ਨਾਮਸਾਰ ਹੀਏ ਧਾਰ ਤਜ ਬਕਾਰ ਮਨ ਗਯੰਦ ਸਤਗੁਰੂ ਸਤਗੁਰੂ ਸਤਗੁਰੂ ਗੋਬਿੰਦ ਜੀ ਓ ਸੋ ਇਸ ਵਾਸਤੇ ਮੈਂ ਅਰਜ ਕਰਾਂਗਾ ਚੰਦ ਰਖਣਾ ਗੁਰਬਾਣੀ ਦਾ ਫੈਸਲਾ ਹੈ ਕਿ ਗੁਰ ਪਰਮੇਸ਼ਰ ਏਕੋ ਜਾਣ ਜੋ ਤਿਸ ਭਾਵੈ ਸੋ ਪ੍ਰਵਾਨ ਜਿੰਨਾ ਗੁਰਸਿੱਖਾਂ ਨੇ ਐਸਾ ਮੰਨ ਲਿਆ ਉਹਨਾਂ ਦਾ ਜੀਵਨ ਉੱਚਾ ਹੈ ਜਿਹੜੇ ਨਹੀਂ ਮੰਨ ਸਕੇ ਮੇਰਾ ਖਿਆਲ ਹੈ ਜੇ ਕਿਤੇ ਇਸ ਇੰਨਾ ਗੁਰਬਾਣੀ ਦੀਆਂ ਪੰਕਤੀਆਂ ਨੂੰ ਵਿਚਾਰ ਲਿਆ ਜਾਏ ਇਥੋਂ ਵਿਚਾਰ ਕੀਤੀ ਜਾਏ ਜੇ ਗੁਰਬਾਣੀ ਵਿਚਾਰ ਕਰਾਂਗੇ ਤੇ ਫਿਰ ਸਤਿਗੁਰੂ ਸੰਸਾਰ ਵਿੱਚ ਦੇਤਾਰੀ ਹੈ ਔਰ ਇਹ ਪਰਮੇਸ਼ਰ ਦਾ ਦੂਸਰਾ ਰੂਪ ਹੈ ਇਹਦੇ ਵਿੱਚ ਕੋਈ ਭੇਦ ਨਹੀਂ ਭਾਈ ਗੁਰਦਾਸ ਕਹਿੰਦੇ ਗੁਰ ਪਰਮੇਸ਼ਰ ਇੱਕ ਹੈ ਸੱਚਾ ਸਾਹਾ ਜਗਤ ਬਣ ਇਸ ਵਾਸਤੇ ਮੈਂ ਅੱਜ ਇਹ ਅਰਜ਼ ਕੀਤੀ ਸੀ ਕਿ ਜੈਸੀ ਕਿਸੇ ਦੀ ਦ੍ਰਿਸ਼ਟੀ ਹੈ वैसी सृष्टि है जे किसी दी दृष्टि ऐसी नहीं बनदी गुरु ते ते एदे विच हुन किसे दा की कसूर है की कह सकदे हां मैं ए अर्ज करागा सच्चे बादशाह कृपा करन के सारी दुनिया इस तरह दी हो जाए के सब नाम जपने वाली हो जाए ते ऐसी दृष्टि हो जाए के सतगुरु नु परमेश्वर मन्नेया जाए ते सलोका दा उद्धार हो सकदा है ते जीवन सफल हो सकदा है एना खुशी कहंदा होया मैं क्षमा दा जाचका सत श्री अकाल